राग सोरठ वार महल्ले चौथे को अंगकार सतगुरु प्रसाद जोर जारी लगी हुई है लिपि लिख गए अच्छा जी पर राग नु लगया हुआ ओंकर है जी ठीक है जी श्लोक महल्ला पहला सूरठी सदा सुहावनी जे सच्चा मन होए गंदी मैल कत मन जीबे सच्चा सोई ਹਰ ਧੀ ਇੰਨਾ ਦੇਰ ਨਹੀਂ ਚਾਹਣਾ ਦੇਰ ਹਾਂਜੀ ਸੈਟ ਹੋ ਜਾਏ ਸੱਚ ਤੇ ਜਿਵੇਂ ਦਸਤ ਪਾ ਕੇ ਕਹਿਣੇ ਸੀ ਤੇ ਦਿਆ ਪਰ ਸਿਰ ਰੋਦਿਆ ਹੁੰਦਾ ਗਿਆ ਤਰ੍ਹਾਂ ਸਰੀਰ ਚਲਾ ਜਾਵੇ ਤਾਂ ਨੁਕਸਾਨ ਸੋਰਠੀ ਜਿਹੜੀ ਆਤਮਾ ਨੇ ਉਹ ਉੱਥੇ ਸਿੰਗ ਵਰਤਿਆ ਨਾ ਲਾਉਣ ਜਾਸੇ ਫਿਰ ਗੁਰਮੁਖੀ ਆ ਸੋਰਠੀ ਵੀ 3 ਲਿੰਗ ਹੈ ਤਾਂ ਹੀ ਅੱਗੇ ਸੁਹਾਵਣੀ ਅੱਖਰ ਆਇਆ ਨੇ ਹਾਂ ਗੁਰਮੁਖੀ ਵਾਸਤੇ ਆਇਆ ਹੈ ਅੱਛਾ ਜੀ ਦਵੇ ਗੁਰਦੀ ਵਾਸਤੇ ਸਦਾ ਹੀ ਸੁਹਾਵਣੀ ਸਦਾ ਬਗਾਸ ਹੈ ਨਾਮ ਦਾ ਭਗਤ ਸਦਾ ਬਗਾਸ ਜੇ ਸੱਚਾ ਮਨ ਹੋਏ ਪਰ ਤਾਂ ਇਹ ਜੇ ਸੱਚਾ ਹੋਵੇ ਸੱਚੀ ਹਾਖੇ ਜੋ ਤੂੜਦੇ ਹਟ ਨਹੀਂ ਜੇ ਸੱਚ ਨੂੰ ਛੱਡ ਕੇ ਕੋਈ ਵੀ ਹੱਡ ਛੱਡ ਗਿਆ ਜੀ ਹਾਂ ਜੀ ਦੰਦੀ ਮੈਲ ਨਾ ਕੱਤ ਬਨ ਜੀਬੇ ਸੱਚਾ ਫਿਰ ਇਹ ਬੰਦ ਹੋਇਆ ਜਦ ਕੋਈ ਚੀਜ਼ ਆਪਾਂ ਨੂੰ ਚੱਬੜੀ ਹੈ ਨਾ ਉਹਨਾਂ ਤੇchnology ਚੱਪੜ ਨੂੰ ਚੱਲਣ ਰਸਤੇ ਸੁਣੀਰ ਵਹਿ ਗਏ ਚੱਪੜ ਖਾਦੇ ਨਾਲ ਅੱਥੇ ਦੋ ਹਿੰਨੇ ਦੋ ਹੱਥ ਵੀ ਕਹਿ ਤਾਂ ਕਿ ਦੋ ਜਵਾਗੇ ਗਏ ਤਾਂ ਇੰਨੇ ਜੁਆ ਨਹੀਂ ਰਹਿਣੀ ਚਾਹੀਦੀ ਰਬੂ ਚ ਖਫਟ ਹੈ ਜਾਂ ਦਿਲ ਚ ਬਰਾਈ ਨਹੀਂ ਹੈ ਕਫਟ ਵੀ ਨਹੀਂ ਹੈ ਹੂੰ ਹੂੰ ਨਾ ਹੈ ਤੇ ਪਰਪਕਾਰ ਜਦ ਆਏ ਸੱਚ ਨੂੰ ਛੱਡ ਦੇ ਤਾਂ ਸਾਰੇ ਹੀ ਕਫਤੀ ਕਿਹ ਹੈ ਧਰਮ ਹੈ ਜਾਂ ਝੂਠ ਦਾ ਪਾਪ ਉੱਥੇ ਫਿਰ ਝੂਠ ਹੈ ਜਗਾਂ ਦੀ ਤੇ ਤੂੰ ਸੱਚ ਦਾ ਗਿਆਨ ਦੀ ਫਿਰ ਝੂਠ ਬੋਲਣ ਨੂੰ ਤਾਰੀਵ ਬੱਤਾਂ ਜੁੜੇ ਇਸੇ ਕਰਕੇ ਮਤਲਬ ਹੈ ਦੁਨ ਕਰੇ ਹਾਂ ਜੀ ਸਸੁਰੇ ਪਈਏ ਭੈ ਵਸੀ ਸਤਗੁਰ ਸੇਵਨ ਸੰਗ ਪਰ ਹਰ ਕੱਪੜ ਜੇ ਫਿਰ ਮਿਲੇ ਖੁਸ਼ੀ ਰਾਵੈ ਫਿਰ ਸੰਗ ਆ ਗਿਆ ਨਾ ਹੁਣ ਸਸਰੇ ਪਈ ਇਹ ਰੋਣਾ ਇਸਤਰੀ ਦੀ ਗੱਲ ਹੈ ਹੂੰ ਹੂੰ ਸਵਾਗਤ ਹੀ ਆਲ ਹਾਂਜੀ ਸਸਰੇ ਪਈ ਇਹ ਕੰ ਭਾਂਗ ਇਸ ਲੋਕ ਦੇ ਵਿੱਚ ਰਹੂ ਉਹਦੀਓ ਗੱਲ ਕਰੂ ਉਹ ਭਲਾਈ ਆਈ ਤਤਪੁਰ ਦੀ ਸੇਵਾਇਕ ਰੁੱਤ ਨੂੰ ਚੱਗੋਗੇ ਕਰੂ ਕੋਈ ਗੱਲ ਸਾਂਝਾ ਕਰ ਮਤਿਏ ਕੋਈ ਆ ਬੇਰੂ ਕੀ ਕਹੂਗਾ ਸਾਡੇ ਆਪਣੇ ਪਰਿਵਾਰ ਤੇ ਖਿਲਾਫ ਗੱਲ ਪਰ ਆਪਣੇ ਨਾਲ ਤੇ ਖਿਲਾਫ ਗੱਲ ਕਰਦੀ ਪਈਆਂ ਨਾਲ ਨੂੰ ਆਪਣੇ ਨਾਲ ਖਿਲਾਫ ਗੱਲ ਕਰਦੀ ਪਈ ਜਿਹੜੇ ਟੱਬਰ ਜਨੂਵਲੇ ਆ ਉਹ ਤਾਂ ਅਸਿੱਧੂ ਸੀ ਉਦੋਂ ਗੱਲ ਕਰਦੀ ਪਈ ਸਾਬ ਕਿਉਂ ਉੱਤੇ ਰਾਜ ਜਾਂਦੇ ਸੀ ਅਸਰ ਦੇ ਵਿੱਚ ਖਿਲਾਫ ਨਹੀਂ ਕਰਨੀ ਪਈ ਉਹਨੂੰ ਸਮਝਾਉਣਾ ਤਾਂ ਡੁੱਬਣ ਵਾਲੇ ਨਾਲ ਵਿੱਚ ਤਰਬਤ ਕਰਨ ਵਾਲਾ 라ਹੁਦਾ ਫਜ਼ਗੱਤ ਕਰਨ ਵਾਸਤੇ ਦਰਤ ਕਰਨ ਤੁਸੀਂ ਡੁੱਬਣ ਵਾਲੇ ਆ ਪੈਸੇ ਠੀਕ ਹੈ ਜੀ ਪਰ ਹਰ ਕੱਪੜ ਜੇ ਫਿਰ ਮਿਲੇ ਹਾਂ ਜੇ ਸਰੀਰ ਦਾ ਕੀ ਹੈ ਇਹ ਜਲ ਆ ਜਾ ਕੱਪੜ ਰੂਹ ਕੋ ਸਾਬ ਨੂੰ ਥੜ ਦੁਨੀਆ ਦਾ ਜਾਵਣਾ ਕੱਪੜਾ ਹਰ ਹਰ ਪਰੇ ਲਾਹ ਕੇ ਬਲਾਰ ਕੱਪੜ ਜੇ ਫਿਰ ਮਿਲੇ ਫਿਰ ਮਿਲੇ ਖੁਸ਼ੀ ਜੀ ਆਵੇ ਤਰਤੁ ਹਾਂ ਜਿਹੜਾ ਸ਼ਬਦ ਹੈ ਨਾ ਹੁਕਮ ਉਹ ਅਸਲ ਜੀ ਸਰੀਰ ਬਣ ਜਾਂਦਾ ਫਿਰ ਬਾਹਲਾ ਸਰੀਰ ਜਿਹੜਾ ਹੈ ਨਾ ਆਹ ਇਹਦੀ ਲੋੜ ਨਹੀਂ ਜੀ ਉਹ ਵੀ ਦੇ ਹੈ ਨਾ ਦੇ ਅਸਲ ਸ਼ਬਦ ਇੱਕ ਮਾਨੇ ਕਿ ਚੱਤ ਹੋ ਗਈ ਜਿਹੜਾ ਸ਼ਬਦ ਪਹਿਲਾ ਹੁੰਦਾ ਉਹਦੇ ਹੀ ਵਰਦ ਦੇ ਵਿੱਚੋਂ ਬੀਜ ਦੇ ਵਿੱਚੋਂ ਪੌਦਾ ਨਿਕਲਦਾ ਹੈ ਬੀਜ ਦੀ ਖੁਸ਼ੀ ਰਾਵੈ ਸਦਾ ਸ਼ਿੰਗਾਰੀ ਨਾਉਮ ਪਦੇ ਨਾ ਮੈਲ ਪਤੰਗ ਸਦਾ ਸ਼ਿੰਗਾਰੀ ਸਦਾ ਸਦਾ ਰਹਿਣਾ ਰਹਿੰਦਾ ਜਿਹੜਾ ਕਹਿੰਦਾ ਚੰਗਲ ਕੋਲ ਦਾ ਹਾਰ ਸਾਰੇ ਗੁਪਤੀ ਰਹਦੀ ਹੈ ਹੂੰ ਹੂੰ ਉਹ ਗਲ ਨਹੀਂ ਡੇਉਂਦਾ ਜਿਹਨਾਂ ਨੇ ਡੇਉਂ ਗਲੀਆਂ ਕੋਨੇ ਗੁਲੀਆਂ ਦਾ ਸਦਾ ਹੀ ਚਾਰ ਬਣੇ ਨੇ ਕਦੇ ਨਾ ਮੈਂ ਪਤੰਗ ਪਤੰਗ ਹੁੰਦਾ ਹੈ ਜਿਹੜਾ ਪਤੰਗ ਹੁੰਦੀ ਹੈ ਹੁੰਦੀ ਹੈ ਨਾ ਹਵਾ ਜਿਵੇਂ ਅਕਾਸ਼ ਦਾ ਸੰਬੰਧ ਪਤੰਗ ਹੁੰਦਾ ਹੈ ਪਤੰਗ ਅਕਾਸ਼ ਵਿੱਚ ਹਾਂ ਜਿਹਦਾ ਪਤੀ ਵਰਗਾ ਹੋ ਗਿਆ ਜਿਹਦਾ ਸਰੀਰ ਜਿਹੜੀ ਪਤੀ ਦੀ ਦੇਹ ਵਿੱਚ ਲੀਨ ਹੋ ਗਈ ਉਹਦੇ ਵਰਗੀ ਹੋ ਗਈ ਉਹ ਪਤੀ ਅੱਗੇ ਪਤੰਗ ਬਣਿਆ ਲੱਗਦਾ ਅਚਨ ਪਰਮੇਸ਼ਰ ਸਰੀਰ ਹੋ ਗਿਆ ਮੈਲ ਖੋਤੀ ਤੇ ਆਪਣਾ ਜਿਹੜਾ ਪਤੰਗ ਗੁਣ ਕਰ ਲਿਆ ਹਾਂ ਜੀ ਮੈਨੂੰ ਲੱਗਦੀ ਪਰਮੇਸ਼ਰ ਨੂੰ ਜਿਵੇਂ ਮੈਨੂੰ ਦੇਵਰ ਜੀਠ ਮੋਹੇ ਦੁੱਖ ਤਸੂ ਕਾ ਡਰ ਕਿਸ ਜੇ ਪ੍ਰਭਾਵੇ ਨਾਨਕਾ ਕਰਮ ਮਣੀ ਸਭ ਸੱਚ ਦੇਵਰ ਜੀਠ ਮੋਹ ਹੈ ਉਹ ਦਿੱਤੇ ਦੇਵਰ ਜੇਠ ਗਰਾਂ ਸੀ ਬਾਗਲਾ ਖੇਤ ਤੋਂ ਪਰ ਦੇਵਰ ਜੇਠ ਦੋ ਹੀ ਕਹੇ ਲੱਗਤ ਹੋ ਗਿਆ ਨਾ ਬੀਜ ਤੇ ਬਰਸ਼ ਬੰਦਾ ਦੇਵਰ ਜੇਠ ਦੋਏ ਨੇ ਦੁੱਖ ਛੱਡਤੀ ਹਾਂ ਨੇ ਵੀ ਛੱਡਤੀ ਪੂਰਾ ਭਾਈ ਛੱਡਤੀ ਉਹ ਆਹੋ ਛੱਡਤੀ ਆਪਣੇ ਪਰ ਸੂਕਾ ਡਰ ਕੇ ਔਰ ਜਿਹੜੀ ਦੁਰਮਤ ਦਾ ਨਾਮ ਲੈਣਾ ਸੀ ਦੁਰਮਤ ਨੂੰ ਕਿਹਨੇ ਬੋਲਣਾ ਨਾ ਸੋ ਸਾਸ ਪਿਆਰੀ ਜਿਹੜੀ ਕਮਦੁਸੀ ਕਮਦ ਦਾ ਡਰ ਕੀ ਲੈਣਾ ਸੀ ਕੋਦ ਤੇ ਚਲਾ ਚਲਦੇ ਤੇ ਦੋਏ ਦੁਆ ਦਾ ਅਸਰ ਸੀ ਦੋਹਾਂ ਦੇ ਉੱਤੇ ਤਾਂ ਲੜਦੇ ਠੀਕ ਹੈ ਜੇ ਫਿਰ ਭਾਵੇਂ ਨਾਨਕਾ ਕਰਮ ਸਭ ਸੱਚ ਬਲਕੇ ਕੇ ਸੱਚ ਸਾਨੂੰ ਜੰਗਾ ਲਗੇ ਤਰਕੀਆ ਸੱਚ ਸਭ ਦਾ ਖਾਸ ਜੇ ਸੱਚ ਬਾਝੇ ਵੇਦੋ ਬੰਦੇ ਸੱਚੀ ਜੀ ਲੱਗਦਾ ਕੌੜਾ ਲੰਗਦਾ ਬਸ ਕੌੜਾ ਲੱਗਦਾ ਬੇਖੁਸ਼ੀ ਜੇ ਨਾਨਕਾ ਤੇਵਾ ਮਾਣੀ ਸਭ ਸੱਚ ਕਰਮ ਬੜੀ ਤੇ ਸਭ ਸੱਚੀਆਂ ਗੱਲਾਂ ਹੋ ਜਾਂਦੀਆਂ ਉਹਦੇ ਪਰ ਸੱਚ ਸਾਧੂ ਚੜ੍ਹਨਾਈ ਉਹ ਬਣੀ ਵੀ ਮਰ ਜਾਂਦੀ ਆ ਮਰੀ ਜਣੀ ਹੈਗੀਆਂ ਇਹ ਸਭ ਸੱਚਾ ਸਭ ਬਾਣੀ ਸੱਚੀ ਹੋ ਜਾਂਦੀ ਆ ਫਿਰ ਲੇਕਿਨ ਸਾਧੂ ਸ਼ੰਕਾ ਰਹਿੰਦੀ ਬਾਣੀ ਤੇ ਵੀ ਆ ਗੱਲ ਕਦੋਂ ਨਾ ਮੈਣ ਉੱਪਰ ਗੱਲਾਂ ਕਹੀਆਂ ਜਿਹੜੀਆਂ ਕੀ ਜਿਹੜੀ ਕਰਮ ਕਿਰਪਾ ਹੈ ਇਹ ਸਭ ਸੱਚ ਹੋ ਜਾਂਦਾ ਠੀਕ ਹੈ ਜੀ ਆਸਾ ਮਹੱਲਾ ਪੰਜਵਾਂ ਚ ਉਹਦੇ ਚ ਲਿਖਿਆ ਹੋਇਆ ਸਸੂ ਤੇ ਫਿਰ ਕਿੰਨੀ ਵਾਖ ਦੇਰ ਜਿਠਾਣੀ ਮੂਈ ਦੁਖ ਸੰਤਾਪ ਸੰਤੇ ਦੇਰ ਜਿਠਾਣੀ ਮੂਈ ਦੁੱਖ ਸੰਤਾਪ ਜਿਹੜੇ ਦੇਵਰੀ ਵਾਲੀ ਸੀ ਜਿਹੜੇ ਸੀਗੇ ਰੁਰਦਾਸ ਅੱਡ ਹੋ ਗਿਆ ਤਾਂ ਜਿਹੜੇ ਦੂਏ ਨੀ ਪਟਪਟਵਾ ਕੀਤਾ ਵੀ ਤੂੰ ਸਾਨੂੰ ਛੱਡ ਕੇ ਨ ਜਾ ਤੂੰ ਤਿਆਰ ਹੋ ਰਿਹਾ ਤਾਂ ਮੈਂ ਠੀਕ ਹੈ ਜੀ ਮਹੱਲਾ ਚੌਥਾ ਸੂਰਠੀ ਤਾਮ ਸੁਹਾਵਣੀ ਜਾਹਰ ਨਾਮ ਟੰਡੋਲੇ ਗੁਰਪੁਰਖ ਮਨਾਵੇ ਆਪਣਾ ਗੁਰਮਤ ਹਰ ਹਰ ਬੋਲੇ ਸੋਢੀ ਜਿਹੜੀ ਜਿਹੜੀ ਗੁਰਮੁਖੀ ਅਵਸਥਾ ਨੂੰ ਚੱਲ ਪਿਆ ਆਦਮੀ ਪਾਗੜਾ ਜੋ ਉਹਦਾ ਵੀ ਗੁਰਮੁਖ ਹੋਇਆ ਜੀ ਆ ਜੋ ਤੁਹਾਡਾ ਜੋ ਰਾਹ ਦੇ ਵਿੱਚ ਹੀ ਹੈ ਤੁਹਾਨੂੰ ਅੱਛਾ ਗੱਲ ਦਾ ਪਤਾ ਲੱਗਦਾ ਛੱਡ ਦਿੰਦਾ ਜਿਹੜੇ ਕੋਲ ਦਾ ਪਤਾ ਲੱਗਦਾ ਤਾਂ ਗੱਲ ਲੰਦਾ ਸੋਢੀ ਤਾਂ ਸੋ ਆਵੜੀ ਸੋ ਆਵੜੀ ਹੀ ਸੋਢੀ ਨਾਮ ਟੰਡੋਲੇ ਜਿਉ ਨਾਮ ਨੂੰ ਜੋ ਖੋਜ ਰਹੀ ਹੈ ਤਾਂ ਵੀ ਠੀਕ ਹੈ ਇਹ ਆਪਣਾ ਆਪਾ ਖੋਜ ਰਹੀ ਹੈ ਅੰਦਰ ਠੀਕ ਵੀ ਸੁਖ ਹੈ ਉਹਦੇ ਅੰਦਰ ਵੀ ਸ਼ਕਤੀ ਬਣੀ ਹੋਈ ਹੈ ਜੇ ਟੋਲ ਨਹੀਂ ਜਿਹੜਾ ਉਹਦੇ ਅੰਦਰ ਵੀ ਚੋਲਦੀ ਹੈ ਸਵਾਵੜੀ ਕਿਹਾਂ ਨਾਮ ਗੁਰਪੁਰਖ ਮਨਾਵੇ ਆਪਣਾ ਗੁਰਮਤਿ ਹਰ ਹਰ ਬੋਲੇ ਗੁਰਪੁਰਖ ਮਨਾਵੇ ਆਪਣਾ ਜਿਹੜਾ ਵਰਪੁਰਖ ਹੈ ਆਪਣਾ ਅੰਤਰ ਆਤਮਾ ਉਹਦੇ ਭਾਵਿ ਤੋਂ ਦੇ ਅਨੁਸਾਰ ਗੁੱਸੇ ਨਹੀਂ ਹੁੰਦੇ ਬੰਦਾ ਉਹ ਉਹਦਾ ਖੈਰ ਲੱਗਦੀ ਹੈ ਮਤਲਬ ਨਾਰਾਜ਼ ਨਾ ਹੋਈ ਉਹ ਨਾਲ ਹੈ ਆਪੜ ਗੁਰਮਤੀ ਹਰ ਹਰ ਬੋਲੇ ਗੁਰਮਤ ਲੈ ਕੇ ਮਤ ਲੈ ਕੇ ਗੁਰਤੀ ਮਤ ਲੈ ਕੇ ਉਹਦੇ ਅਨੁਸਾਰ ਹੀ ਗੋਲ ਬੋਲਦੀ ਹੈ ਹਰ ਹਰ ਬੋਲੇ ਜਿਆਕਾਰੀ ਗੱਲ ਕਰਦੀ ਠੀਕ ਹੈ ਜਿੱਦੀ ਕੋਈ ਤੀਆ ਉਹ ਨਹੀਂ ਕਰਦੀ ਹੈ ਪੂਰੀ ਨਹੀਂ ਵੀ ਕਰ ਸਕਦੀ ਹਾਂਜੀ ਹਰ ਪ੍ਰੇਮ ਕਸਾਈ ਦਿਨ ਸਰਾਤ ਹਰ ਰਤੀ ਹਰ ਰੰਗ ਚੋਲੇ ਪਰ ਜੈਸਾ ਪੁਰਖ ਨ ਲੱਭਈ ਸਭ ਦੇਖਿਆ ਜਗਤ ਮੈਂ ਟੋਲੀ ਹਾਂ ਹਰ ਪ੍ਰੇਮ ਕਸਾਈ ਦਿਨ ਸਰਾਤ ਹਾਂਜੀ ਜਿਹੜਾ ਪ੍ਰੇਮ ਹੈ ਇਹਦੀ ਖਿੱਚ ਕਸਾਈ ਕਿੰਨੂ ਵੀ ਕਹਦੇ ਆਕਾਸ਼ ਤੋਂ ਕਿ ਦਿਨ ਰਾਤ ਉਹਦੇ ਅੰਦਰ ਪ੍ਰੇਮ ਦੀ ਖਿੱਚ ਪਈ ਰਹਦੀ ਹੈ ਅੱਛਾ ਆਪਣਾ ਰਹੀ ਆਪਣਾ ਜਿਹੜਾ ਹੈ ਪੁੱਤੇ ਕਰਨ ਆਪਣੇ ਆਪ ਨੂੰ ਉਹ ਤੇ ਰੰਗ ਚਲ ਰਹੀ ਹੈ ਗੈਨ ਨੂੰ ਨੰਨੇ ਦੇ ਕੇ ਰੰਗੀ ਜਾ ਰਹੀ ਹੈ ਹੌਲੀ ਹੌਲੀ ਰੰਗ ਪੂਰਾ ਉਹਦਾ ਚਲੇ ਜੀ ਠੀਕ ਹੈ ਹਰ ਜੈਸਾ ਦੇਖਿਆ ਜਗਤ ਮੈਂ ਟੋਲੇ ਉਹਨੂੰ ਇਹ ਪਤਾ ਹੈਗਾ ਵੀ ਹੱਜੇ ਪੁਰਖ ਨਹੀਂ ਹੈ ਸਭ ਟੋਲਿਆ ਵਾਕੀ ਉਹਦੇ ਉੱਪਰ ਕੇ ਦੇਖ ਲੈਂਦਾ ਜਿਹੜਾ ਕਵੀ ਸਾਰਾ ਦੇਖ ਲਿਆ ਸੀਗਾ ਤਾਂ ਪਤਾ ਲੱਗਿਆ ਕਿ ਆਹੀ ਠੀਕ ਹੈ ਹੋਰ ਤਾਂ ਹੀ ਕੋਈ ਗੁਰੂ ਗ੍ਰੰਥ ਸਾਹਿਬ ਨੇ ਦੇਖ ਲਈ ਸਾਰੇ ਫਿਰਕੇ ਨਹੀਂ ਸੀ ਹੋਰ ਕੁਝ ਵੀ ਇਹ ਸੀ ਆਖਰੀ ਇਲਾਜ ਕੋਈ ਕਹਿ ਰਹਿੰਦਾ ਸਾਰਾ ਜੰਤ ਕੋ ਫਿਰਕੇ ਦੇਖ ਲੈ ਜਗਤ ਕੀ ਕੋ ਦੇ ਵਿੱਚ ਉਹ ਹੀ ਪ੍ਰਚਾਰ ਹੈ ਠੀਕ ਹੈ ਜੀ ਕਿਸੇ ਪੁਰਖ ਦੇ ਬਰਾਬਰ ਕੋਈ ਨਹੀਂ ਸਭ ਤੋਂ ਵੱਡਾ ਪੁਰਖ ਹੈ ਸਾਡੇ ਵਾਸਤੇ ਹਰ ਹੀ ਹੈ ਹਰੇ ਪੁਰਖ ਹੈ ਇਹ ਨੁਣਝਣਾ ਹਰ ਪੁਰਖ ਦਾ ਰੰਗ ਹੈ ਗੁਰ ਪੁਰਖ ਦਾ ਗੁਰ ਸਤਗੁਰ ਨਾਮ ਦਰੜਾਇਆ ਮਨ ਅਨੰਤ ਨ ਕਾਹੂ ਡੋਲੇ ਜੈ ਨਾਨਕ ਹਰਿ ਕਾ ਦਾਸ ਹੈ ਗੁਰ ਸਤਗੁਰ ਕੇ ਗੋਲ ਗੋਲੇ ਗੁਰ ਸਤਗੁਰ ਨੇ ਹੈ ਪਰ ਅਨੰਤ ਨਾ ਕਾਹੂ ਡੋਲੇ ਕਾਹੂ ਡੋਲੇ ਕਿਤੇ ਵੀ ਡੋਲਦਾ ਅਖੀਰ ਤੱਕ ਨਹੀਂ ਡੋਲਦਾ ਜਿੰਨਾ ਚਿਰ ਸ੍ਰਿਸ਼ਟੀ ਹੈਗੀ ਨਹੀਂ ਡੋਲਦਾ ਕਿਸੇ ਪਾਸੇ ਧਿਆਨ ਨਹੀਂ ਜਾਂਦਾ ਇਹਦਾ ਦੋ ਨੰਬਰ ਬੰਦਾ ਕੋਈ ਚੀਜ਼ ਐਸੀ ਨਹੀਂ ਸਾਹ ਦੇ ਜਿਹੜੀ ਜਦੋਂ ਕੀ ਹੋਵੇ ਐਨਾਉਂ ਕਰਦੇ ਚੁੱਗੀ ਲੱਗਦੀ ਹੋਵੇ ਲੋਕ ਚੰਗਾ ਜਿਹਾ ਦਾਸ ਹੈ ਕੇ ਗੋਲ ਗੋਲ ਇਸ ਕਰਕੇ ਸਤਪੁਰ ਦੇ ਲੋਕ ਡੜਾਇਆ ਗੁਰ ਸਤਗੁਰ ਕੇ ਗੋਲ ਗੋਲੇ ਗੁਰ ਸਤਗੁਰ ਦੇ ਅਸੀਂ ਬੋਲੇਗਾ ਪੌੜੀ ਤੂੰ ਆਪੇ ਸ੍ਰਿਸ਼ਟ ਕਰਤਾ ਸਿਰਜਣਹਾਰਿਆ ਆਪੇ ਖੇਲ ਰਚਾਏ ਤੁਧ ਆਪ ਸਵਾਰਿਆ ਦਾਤਾ ਕਰਤਾ ਆਪ ਆਪ ਭੋਗਣਹਾਰਿਆ ਕੋਣ ਪਾਸੇ ਲੱਗ ਜਾਣਾ ਆਪ ਲੱਭ ਅੱਛਾ ਜੀ ਆਪ ਸ਼ਬਦ ਗੁਰੂ ਤੇ ਲੱਗ ਜਾਣਾ ਆਪ ਰਤਬੂ ਤੇ ਲੱਗ ਜਾਣਾ ਕਿੱਕਤੇ ਜਿਹੜਾ ਹੁੰਦਾ ਉਹ ਤਰ੍ਹਾਂ ਹੀ ਹੁੰਦਾ। ਕੋਹ ਜੁਨੇ ਬੀਜਨੇ ਵਿੱਚ ਵੱਢ। ਉਹ ਫਿਰ ਛਾਹ ਬੀਜ, ਦਲ ਇੱਕੋ ਹੀ ਆ। ਇਸ ਕਰਕੇ ਗੁਰ ਜਿਹੜਾ ਹੈਗਾ ਗੁਰ ਪਰਮੇਸ਼ਰ ਇੱਕੋ ਜਨ ਕੇ ਹ। ਉਹ ਇੱਕ ਬੀਜ ਜੰਮਿਆ ਹੋਇਆ ਹੈ ਇੱਕ ਜੰਮਿਆ ਹੋਇਆ ਫਰਕ ਤਾਂ ਕੁਝ ਵੀ ਨਹੀਂ ਹੈ ਵੀ ਫਰਕ ਹੈ ਵੀ ਨਹੀਂ ਫਰਕ। ਇੱਕ ਰਾਜਾ ਸੁੱਤਾ ਪਿਆ, ਇੱਕ ਰਾਜਾ ਜਾਗਦਾ। ਇੱਕ ਰਾਜਾ ਸੁਪਨਾ ਦੇਖਦਾ ਹੈ ਜਾਗਦਾ। ਕਿਉਂਕਿ ਜਿਹੜਾ ਸੁੱਤਾ ਪਿਆ ਰਾਜਾ ਸੁਪਨਾ ਦੇਖਦਾ ਕੀ ਉਹ ਰਾਜਾ ਨਹੀਂ ਹੈ। ਜਾਗਦੇ ਵਾਸਤੇ ਤਾਂ ਰਾਜਾਈ ਹੈ ਪਰ ਆਪਣੇ ਆਪ ਜੋ ਬੁਖਾਰੀ ਬਣਦਾ ਹੈ ਬੁਖਾਰੀ ਉਹ ਖੁਦ ਨੂੰ ਬੁਖਾਰੀ ਬਣਦਾ ਬੁਖਾਰੀ ਹੋ ਹੈ ਨਹੀਂ ਉਸ ਐਂਗਲ ਤੋਂ ਸੀ ਜੇ ਐਂਗਲ ਤੋਂ ਭਗਤੀ ਨੂੰ ਖੜ ਕੇ ਵਿਚਾਰਾਂ ਤੇ ਫਿਰ ਤਾਂ ਭਗਤੀ ਠੀਕ ਹੈ ਨਹੀਂ ਇਹ ਗੱਲ ਯਾਦੂਗੀ ਸਰਤੇ ਨੇ ਸੋਈ ਮੁੜ ਕੇ ਤੂੰ ਪਿਆ ਜਾ ਕੇ ਔਰ ਮਤਲਬ ਹੈ ਫਿਰ ਆਪ ਬਣ ਗਿਆ ਫਿਰ ਤਾਂ ਆਪ ਵੀ ਉਹੀ ਹੈ ਕਹਿੰਦਾ ਤੂੰ ਵੀ ਉਹੀ ਸੀਗਾ ਤੋਹੇ ਬੋਹੇ ਤੋਹੇ ਅੰਤਰ ਕਹਿਤਾ ਤਾਰਕ ਕਟਨ ਜਲ ਪ੍ਰਭ ਜੈਸਾ ਜਿੰਨਾ ਚਿਰ ਸੁਪਣਾ ਸੀ ਦੁਆ ਸਮਝਦਾ ਸੀ ਹੋਰ ਸਮਝਦਾ ਸੀ ਟੱਗਿਆ ਜਾਂ ਜਾ ਗਿਆ ਜੇ ਤੂੰ ਆਪੇ ਸਿਸ਼ਟ ਕਰਤਾ ਸਿਜਣ ਹਾਰਿਆ ਇਸ ਤੋਂ ਭਾਵ ਪਰਮੇਸ਼ਰ ਦਾ ਹੈ ਜੀ ਪਹਿਲਾਂ ਦੇਖੋ ਅੱਧਾ ਸਿਜਣ ਹਾਰਿਆ ਅੱਧਾ ਰੱਖਣ ਹਾਰਿਆ ਕਰਕੇ ਰੱਖਣਾ ਹਾਂ ਹਾਂ ਜਿਤ ਸ਼ਕਤੀ ਕਿੱਥੋਂ ਮਿਲ ਜੇ ਸ਼ਬਦ ਦੀ ਪਹਿਲਾਂ ਸਿਜਣ ਨਹੀਂ ਕਰ ਸਕਦਾ ਤੂੰ ਆ ਹੋ ਗਿਆ ਗੁਰੂ ਗੁਰੂ ਗੁਰੂ ਗੁਰੂ ਗੁਰੂ ਜਪ ਸਤਿਗੁਰੂ ਜਪ ਗੁਰੂ ਦਾ ਹੀ ਕਰਨਾ ਪਰ ਗੁਰੂ ਆਰ ਗੁਰੂ ਚ ਕੋਈ ਫਰਕ ਨਹੀਂ ਦਿੰਦਾ ਇਹ ਪਾਣੀ ਆ ਲਹਿਰ ਤੇ ਫਰਕ ਕੋਈ ਨਹੀਂ ਕਿਉਂ ਲਹਿਰ ਦੇ ਜਿਹੜੀ ਬਾਹਰ ਕੱਢ ਸਕਦਾ ਸਾਲ ਦੇ ਤੇ ਜਿਹੜੀਆਂ ਆਤਮਾ ਕੋਈ ਵਿਛੜੀ ਹੋਈ ਚ ਸੱਚੀ ਗੱਲ ਤਾਂ ਉਹਨੂੰ ਉੱਦਣ ਲੈ ਕੇ ਜੇ ਆਉਣ ਤਾਂ ਨਾਮ ਦੇ ਚੀ ਲੈ ਆ ਸਕਦਾ ਉਹ ਲਹਿਰੇ ਸਮਝ ਮਾਤ ਵਿਛੜੀ ਹੋ ਸਕਦਾ ਕੋਈ ਤੇ ਜੋ ਕਰਨਾ ਸਜਣ ਹਾਲ ਨਾਲ ਹੋ ਹੋਰ ਗੱਲ ਆ ਅਥੀ ਰਚਣ ਵਾਲਾ ਰਚਣ ਵਾਲੇ ਘਰ ਸੁਧੀ ਬੈਠੇ ਜਿਵੇਂ ਘਮਾਰ ਭਾਤੇ ਬਲੂ ਦਾ ਘਮਾਰ ਬਾਹਰ ਬੈਠਿਆ ਭਾਤੇ ਸਾਡੇ ਵਿੱਚ ਨਹੀਂ ਹੈ ਉਹਦੇ ਠੀਕ ਹੈ ਜੀ ਉਹ ਹੋਇਆ ਰਚਣ ਵਾਲਾ ਬੈਠਿਆ ਲੋ ਫਿਰ ਵੀ ਮਨ ਦੇ ਵਿੱਚ ਹੈ ਤਨ ਚੋਂ ਖੋਜਣਾ ਮਨ ਲੱਭਿਆ ਤਾਂ ਵਿੱਚੋਂ ਸਰਕਸਨੰਦਨ ਆਰਧਮਨ ਸੇਖਾਟਲ ਪੀਟ ਜੋਤ ਹੈ ਸਰੀਰ ਦੇ ਵਿੱਚੋਂ ਮਿਲਿਆ ਜੋਤ ਜੋਤ ਨਾ ਜਾਂਦਾ ਜੋਤ ਵਿੱਚ ਕਰ ਜੋਤ ਨਹੀਂ ਹੋਈ ਹੈ ਸੂਰਜ ਸਾਡੇ ਵਿੱਚ ਵੀ ਜੁੜਿਆ ਹੋਇਆ ਹੈ ਸਾਡੇ ਨਾਲ ਧੁੱਪ ਜੁੜੀ ਹੋਈ ਹੈ ਸੋਚਾਲ ਠੀਕ ਹੈ ਧੁੱਪ ਦੇ ਜਰੀਏ ਫਸਾਣ ਨੂੰ ਵਧਦੀ ਵਧਦੀ ਹੈ ਜੋ ਵੀ ਕੁਝ ਮਿਲਦਾ ਪ੍ਰਾਪਤੀਆਂ ਦੀਆਂ ਸਾਨੂੰ ਧੁੱਪ ਦੇ ਜਰੀਏ ਹੁੰਦੀਆਂ ਨਾ ਸੂਰਜ ਤੋਂ ਜੜੂ ਹੁੰਦੀ ਹੈ ਪੁਰਜਾ ਤੋਂ ਬੰਦ ਦੋ ਮੰਨ ਲਿਆ ਹੈ ਕੋਈ ਵੈਸੇ ਜਿਵੇਂ ਬੰਦ ਜਿਤਨਾ ਦੋ ਹੈ ਹੈ ਕੋਈ ਕਹਿਣ ਨੂੰ ਕੋਈ ਦੂਜਾ ਤੂੰ ਆਪੇ ਖੇਲ ਰਚਾਇਆ ਤੂੰ ਆਪ ਸਵਾਰਿਆ ਕੇ ਅਰ ਨੂੰ ਸਰਜਣ ਨਾਲੇ ਨੂੰ ਤਾਂ ਕੇ ਹੈ ਦੂਜਿਆਂ ਦੀਆਂ ਮੰਤੇ ਕੋਈ ਵੱਖਰੀ ਚੀਜ਼ ਨਹੀਂ ਹੈ ਤੇਰਾ ਹੀ ਤਾਂ ਹੈ ਤੇਰੀਓ ਕਲਾ ਸੂਰਜ ਦੀ ਕਲਾ ਹੈ ਨਾ ਸਾਡੇ ਜਿਹੜੀ ਗਰਮੀ ਪੈਂਦੀ ਹੈ ਸੂਰਜ ਤੋਂ ਹੀ ਆਉਂਦੀ ਹੈ ਨਾ ਹਾਂ ਤੇ ਆਪਰੇ ਖੇਤ ਕਿ ਆਇਆ ਤੁਸੀਂ ਆਪ ਸਵਾਰੇ ਆਇਆ ਆਪੇ ਮਨੂ ਸਵਾਰੇ ਤੂੰ ਦੇਖੋ ਕੋ ਆਇਆ ਵਿੱਚ ਪਹਿਲਾਂ ਮਾਇਆ ਨੂੰ ਛੱਡ ਸਮਝਾ ਰਹੇ ਹਾਂ ਨੂੰ ਮਾਇਆ ਨੂੰ ਉਹ ਨਾ ਕਰ ਕੋ ਪਿੱਛੇ ੜਾ ਕਰਕੇ ਪਹਿਲਾਂ ਗੱਲਬਾਤ ਦੇ ਵਿੱਚ ਇਹਨੂੰ ਖੜ ਲਾ ਪਹਿਲੇ ਚ ਰਲ ਜਾ ਕਿਉਂ ਕਿਉਂ ਆਇਓ ਸੀ ਸੋੜ ਬੜਕੋ ਬੜਕੋ ਪੜਨੋਂ ਕੱਢ ਚਾਹੀਦੇ ਤੇ ਕੱਲ ਮਾਇਆ ਦੇ ਹੁੰਦੇ ਅੱਖਾਂ ਚਾਹੀਦੀਆਂ ਸੀ ਪੜਨ ਵਾਸਤੇ ਇਹ ਦੋ ਤਿੰਨ ਡਿਵੈਲਪਮੈਂਟ ਨਹੀਂ ਸੀ ਓੜੀ ਗਿਆਨ ਸੀ ਮਿਲ ਸਕਲਾ ਕੇ ਹੋ ਰਿਹਾ ਹੁਣ ਕੁਝ ਕਿਆ ਕਰਨਾ ਗਿਆ ਤਾਂ ਰੋਕੇ ਰੋਕੇ ਆ ਸੱਜਾ ਨਾ ਇਹ ਤੋਂ ਗਾਹੀ ਬੰਦਨ ਇੱਥੇ ਤੱਕੇ ਆਪਣਾ ਮਾਇਆ ਦੀ ਲੋੜ ਹੈ ਬਾਤਾਂ ਕਰਤਾ ਆਪ ਭੋਗਣ ਹਾਰੇ ਵੀ ਆਪ ਕਰਤਾ ਵੀ ਆਪ ਮਨ ਤੇਰੇ ਤੋਂ ਪਹਿਲਾਂ ਹੋਇਆ ਹੈ ਸਾਨੂੰ ਜੋ ਸਿੱਖਿਆ ਦੇ ਰਿਹਾ ਉਹ ਹੀ ਦੇ ਰਿਹਾ ਆਦਮੀ ਕੁਝ ਦੇ ਰਿਹਾ ਮਨ ਤਾਂ ਤੇਰੇ ਨਾਲ ਸੰਪਰਕ ਹਨ ਬ੍ਰਹਮ ਦਾ ਗਾਂ ਆਪ ਹੀ ਖਾਣ ਵਾਲਾ ਕਰਤਾ ਲੱਗਦਾ ਦਾਤ ਪ੍ਰਾਪਤ ਕਰ ਰਿਹਾ ਭੋਗਣ ਹਾਰਿਆ ਠੀਕ ਹੈ ਜੀ ਸਭ ਤੇਰਾ ਸ਼ਬਦ ਵਰਤਾ ਹੈ ਉਪਾਵਨ ਹਾਰਿਆ ਸਭ ਤੇੜਾ ਸਭ ਵਰ ਸਾਰੇ ਤੇੜਾ ਹੀ ਹੁਕਮ ਵਰਤਦਾ ਉਹਦੇ ਇਸ ਵਰਤਦਾ ਪਾਵਨ ਹਾਲਿਆ ਪੈਦਾ ਕਰਨ ਵਾਲਿਆ ਇਹ ਪਾਵਨ ਹਾਲਿਆ ਇਹ ਹੁਣ ਪਿੱਛੇ ਆ ਕੇ ਪਰਵੇਸ਼ ਨੂੰ ਆ ਗਏ ਉੱਤਰ ਆਨਾਰ ਪਰਵੇਸ਼ੇ ਕੁ ਹੋਈ ਨੇ ਨੇਥੇ ਚੱਕਿਆ ਨੂੰ ਉਹ ਪਾਵਨ ਹਾਂਜੀ ਹਾਂ ਗੁਰਮੁਖ ਸਦਾ ਸਲਾਹੀ ਗੁਰ ਕੋ ਆ ਗਿਆ ਹੁਣ ਲੱਗਦਾ ਇਥੇ ਗੁਰੇ ਆਇਆ ਮਨੁਜੋ உபਦੇਸ਼ ਬੰਦਾ ਅਤਿ ਅਤਮੁਤੇ ਕੋਈ ਕੰਨਾ ਨਾ ਐਦਿਕ ਕਰ। ਤੂੰ ਬੁੱਧ ਜਿਹੜੀ ਹੈਗੀ ਉਹ ਅਤਰਾਤਮਾ ਉਹ ਬਰੋਕਦੀ ਹੈ ਸਾਡੂ ਰੋਕਦੀ ਹੈ ਦੇ, ਪੁਲਟ ਕੰਮ। ਚਾਵਣ ਸਾਰੇ ਆ। ਤੋਂ ਗੁਰਮੁਖ ਸਦਾ ਸਦਾ ਹੀ ਗੁਰ ਕੋ ਜਿਹੜਾ ਗੁਰਮੁਖੀ ਹੈ ਸਾਡਾ ਸਲਾਹ ਕਰਦਾ ਹੈ ਕਿ ਜਿਹੜਾ ਹੈ ਲੈ ਆਪਣੇ ਗੁਰ ਕੀ ਕਰਦਾ ਮੈਂ ਆਪਣਾ ਗੁਰੂ ਦੇਖਿਆ ਆਪਣੇ ਅੰਦਰ ਹੀ ਝੱਟਦਾ ਜਿਹੜਾ ਉਹਦੇ ਅੰਦਰ ਉਹਨੂੰ ਸਿੱਖਿਆ ਕਰ ਰਿਹਾ ਉਹਦੇ ਉਹ ਤੋਂ ਸਰਬੰਧ ਜਾਂਦਾ। ਉਹ ਤੋਂ ਕੁਰਬਾਨੀ ਜਿਹੜੀ ਉਹਦਾ ਆਪਣੀ ਮਰਜ਼ੀ ਤਿਆਗ ਦੇਣਾ ਉਹ ਚੋਟੀ ਗੱਲ ਮੰਨਣੀ ਆਪਣੀ ਆਪਣੀ ਮਰਜ਼ੀ ਨੂੰ ਕੁਰਬਾਨ ਕਰ ਕੁਰਬਾਨ ਹੋਣਾ ਠੀਕ ਹੈ ਜੀ ਇੱਥੇ ਪਹਿਲੀ ਪੌੜੀ ਸਮਾਪਤ ਹੋ ਗਈ ਜੀ